ਯਦਿਸ਼ਰ ਕੋ ਸਭਾ ਬਨਾਈ ਕਥਨੰਸ ਸੋਈਆ ਮੈਂ ਇਕ ਦੇਤ ਤੋ ਤਨ ਆਏ ਕੈ ਸੁੰਦਰੀ ਇਕ ਸਭਾ ਸੋ ਬਨਾਈ ਲਜਿਤ ਹੋਏ ਰਹੇ ਅਮਰਾਵਤ ਐਸੀ ਪ੍ਰਵਾਹਿ ਪੂ ਮਹਾਈ ਬੈਠ ਵਿਰਾਜਤ ਪੂ ਤਹਾ ਜਦ ਵੀਰ ਲਿਏ ਭਾਈ ਸਿਆਮ ਤੇ ਆਭੈ ਕੀ ਉਪਮਾ ਮੁਖਤੇ ਬਰਨੀ ਨਹ ਜਾਈ ਸੋਈਆ ਨੀਰ ਟਰੇ ਕਉ ਚਾਦਰ ਛੱਤਨ ਛੂਟ ਰਹਾ ਕਉ ਠੌਰ ਫੁਹਾਰੇ ਮਲ ਭਰੇ ਕਉ ਮਤ ਕਰੀ ਕਉ ਨਾਚਦ ਕੇ ਇਨਕੇ ਸੋ ਆਖਾਰੇ ਬਾਜ ਨਰੈ ਕਉ ਸਾਜ ਛਾਜਤ ਹੈ ਅਤ ਜੀਲ ਰਾਜ ਸ੍ਰੀ ਬ੍ਰਿਜਨਾਥ ਜਿਮ ਧਾਰਨ ਮੈਂ ਸਸੀ ਸਿਆਮ ਉਚਾਰੇ ਜੋਤ ਲਸੈ ਕਉ ਬਜਰਨ ਕੀ ਲਾਲ ਲਗੇ ਛੱਪ ਮੰਦਰ ਪਾਵੈ ਨਾਗਨ ਕੋ ਪੁਰੀ ਸੁਰ ਦੇਖ ਪ੍ਰਵਾਜੇ ਸੀਸ ਨਿਵਾਵੈ ਰੀਤ ਰਹੇ ਜੇ ਦੇਖ ਚਤੁਰਮੁਖ ਹੇਰ ਪ੍ਰਵਾਹ ਸਿਵ ਸੋ ਲਲਚਾਵੇ ਭੂਜਾਂ ਤਾ ਨੀਰ ਸੋ ਲਾਗਤ ਨੀਰ ਜਹਾਂ ਨਹੀਂ ਚੀਨ ਬੋ ਆਵੇ ਯੁਦਿਸ਼્థਰ ਬਾਦ ਦੁਰਯੋਧਨ ਸੋ ਸਵੈਜਾ ਐਸੀ ਸਵਾਰਾ ਕਹਿ ਸੋ ਯੁਦਿਸ਼્థਰ ਅੰਤ ਗਵਾਲਗ ਬੋਲ ਪਠਾਇਓ ਸੂਰਜ ਕੋ ਸਤ ਸੰਗ ਲੀਏ ਹਰ ਮਾਨ ਭਰਿਓ ਸੋ ਆਇਓ भूमि जहां उतीता है लख्यो जल बार होतो जह भूमि जन आयो जाय न संक परयो जल में कल श्याम कह कज भेद ना पायो जाय परयो तब ही शरम तन वस्त्र धरे पुन बूड़ गयो है बूड़त जो निगस्यो सो भूत चित्त बिखायत को कहयो है कान जूं भार उतारन के हित आंख सों भीमह भेद सो ए पासो बोल उठ्यो अरे अंध के अंध ही पुत्र पयो है यो जब पीम सते कहो तो कनो चित पीतर पू प्रसादो मोको पांडको पुत्र हसे अब ही बध या को करो जी आयो पीख मित्रो दिस मर मैं जड पीम पयो कह श्याम सुनायो ताम गयो अपने फिर कहस सवाय पीतर फेर ना आयो ਇਤਸਰੀ ਮਚੇ ਤਰਲਾਟ ਕੇ ਗ੍ਰੰਥੇ ਕ੍ਰਿਸ਼ਨਾ ਤਾਰੇ ਦ੍ਰਿਯੋਦਨ ਸਵਾ ਦੇਖ ਤਾਮ ਗਏ ਧਿਆਇ ਅਥ ਦਇਤ ਬਕੱਤਰ ਜੁਦ ਕਥਨੰਗ ਸੋਈਆ ਉਤਕੋਪ ਦ੍ਰਿਯੋਦਨ ਤਾਮ ਗਯੋ ਇਤ ਦਇਤ ਤੋ ਤੇ ਕੋਪ ਵਸਾਇੋ ਕਾਹ ਨ ਕਿਉ ਸਿਸ਼ਪਾਲ ਤੋ ਮੇਰੋ ਮਿੱਤਰ ਮਰਿਯੋ ਨਰਤੀ ਸੁਖ ਚਾਇਓ ਲੈ ਸਿਵਤੇ ਬਰ ਹੋ ਏ ਕੋਪਦ ਕਰੋ ਜੀਵ ਭੀਤਰ ਆਇਓ ਤਾਏ केदार ਕੀ ਔਰ चल्यो कब श्याम है चित ਮੈ ठहरायो बद्री केदार के पीत जाय कै सेव करी महारुद्र बिझायो लै कै विमान चल्यो उत पे जब ही हार के बद को भर पायो द्वारवतीयों के पीत आए कै कान के पुत्र सों युद्ध मचायो सो ਦਵਾਰਵਤੀ ਹੂ ਕੇ ਬੀਜ ਜਬੈ ਹਰ ਝੂਗਿਉ ਤਉ ਸੋ ਸਤਰ ਨਿਹਾਰਿਉ ਸਿਆਮ ਪਨੈ ਤਬਹੀ ਤਿਹ ਕਉ ਲਰ ਰੇ ਹੰਸੋ ਬ੍ਰਿਧਨਾਥ ਉਚਾਰਿਉ ਜੋ ਸੁਨਵਾ ਪਤਿਆ ਹਰ ਕੋ ਕਸ ਕਾਨ ਪ੍ਰਮਾਨ ਲਵ ਬਾਨ ਤਚੀ ਅਤਿ ਭਾਵਕ ਉਪਰ ਕਾਹੂ 부ਝਾਇ ਬੇ ਕੋ ਮਾਰਤ ਭਇਓ ਪਰ ਬਾਨ ਹਰ ਸਿੰਦਨ ਵਾਹੀ ਕੀ ਔਰ ਤਵਾਯੋ ਆਵਤ ਭਇਓ ਉਤਤੇ ਅਰਸੋ ਇਤਤੇ ਇਹੂ ਗੇ ਮਿਲ ਕੈ ਰਣ ਪਾਇਓ ਸਿੰਦਨ ਹੂ ਬਲ ਸਕ ਸਿੰਦਨ ਟਾਇ ਦਇਓ ਕਬਿ ਜੋ ਜਸ ਗਾਇਓ ਜਿਉ ਸਹਾਬਾਜ ਮਨੋ ਚੱਕਵਾ ਏਕ ਤਕਾ ਹੂ ਕੇ ਮਾਰ ਗਿਰਾਇਓ ਸੋ ਕਬਿ ਸ਼ਾਮ ਕਹਿ ਕਟ ਗਰੀਬ ਗਿرائی ਔਰ ਤੀ ਤਿਹ ਕੇ ਸੰਗ ਸੈਨ ਹੁਤੀ ਸੋ ਭਲੇ ਜਮ ਲੋਕ ਪਠਾਈ ਰੋਸ ਪਰਿਓ ਅਰ ਠਾਡੋ ਰਿਓ ਰਣ ਸੋਪਮਾ ਕਬਿ ਸ਼ਾਮ ਸੁਨਾਈ ਧੀ ਬ੍ਰਿਜ ਨਾਇਕ ਚੌਦ ਹੂ ਮੈਂ ਪਾਵਤ ਭਇਓ ਬੜੀ ਜੋ ਸੋ ਵਡਾਈ ਦੋਹਰਾ ਦੰਤ ਬਕਰ ਤਬ ਚਿਤ ਮੈਂ ਅਤਿ ਹੀ ਕੋਬ ਢਾਏ ਸ੍ਰੀ ਜਗਤਪਤ ਜਹ ठाੜ ਹੋ ਸੋਈਆ ਸ੍ਰੀ ਬ੍ਰਿਜ ਨਾਇਕ ਕਹੋ ਜਬ ਹੀ ਤਿਨ ਆਏ ਯੋਧਨ beech ਹਕਾਰਿਓ ਹਉ ਮਰਿ ਹੋ ਨੀ ਜੋ ਕਹੋ ਤਾਏ ਸੋ ਜੋ ਸਿਰ ਬਲੀ ਤੋ ਹੀ ਐਸੇ ਸੁਨਿਓ ਜਬ ਸ਼ਾਮ ਜੂ ਬੈਨ ਤਬੈ ਹਰ ਜੂ ਪੁਨ ਬਾਨ ਸੰਭਾਰਿਓ सत्र को श्याम पनय रथ ते पुन मूर्छक कर भू पर डारयो सवैया लै सो लोग गयो फिर को पर रण पीत आयो कान के बाप को कान ही कहो काट माया को कह एक मून दिखायो कोप कियो कंस श्याम तब अर नैन दुहून ते नीर बहायो हाथ पे चक्र सुदर्शन ले हरि सिर काट के भू गिरायो बकतर दयत बधाई धाय अथ वैदूर्द हृदय पद कथन कव्यो बा सवैया जाहे सिवादिक ब्रह्म निमयो सो सदा अपने चित बीज विचार्यो श्याम पनाय तिन कहो तभी कबही कृपा निद्र रूप दिखार्यो रंग न रूप औ राग न रेख यह चहु वेदन भेद उचार्यो ता धर्मो मूर्त जोद बिखै श्याम पनाय रण बीज संगार्यो ਦੋਰਾ ਕ੍ਰਿਸ਼ਨ ਕੋ ਤਬ 76 ਦਵੈ ਨਰਮੈ ਦੇਖ ਪਾਏ ਤੀਸਰ ਜੋ ਜੀਵਤ ਬਚਿਓ ਸੋ ਤੇ ਪਹੁੰਚਿ ਆਏ ਦਾਂਤਨ sondo hot kad do nachavtan nain tab ਦਰ ਤੇ ਸੋ kahe kahat syam ye bain soiya kyon jad judh karay har se mad keetav se je 70 khpaaye raavan se harnaak se se harnaashu se ਕੰਸਾ ਸੇ ਅਰ ਸਿੰਧ ਜਰਾ ਸੰਗ ਦੇਸਨ ਦੇਸਨ ਕੇ ਨਿਰਪ ਆਏ ਤੈਰੇ ਕਹਾ ਅਰੇ ਸੋਛਿਨ ਮੈ ਇਹ ਸ਼ਿਆਮ ਪਨੈ ਜਮ ਲੋਕ ਪਠਾਏ ਸ੍ਰੀ ਬ੍ਰਿਜਨਾਥ ਵੈ ਤੇ ਸੋ ਕਵ ਸ਼ਾਮ ਕਹੈ ਇਹ ਪਾਂ ਤਿ ਮੈਂ ਬਖਬੀਰ ਅਗਾ ਸਰਮਾਰ ਸੋ ਕੀ ਸੰਦੇ ਕਹ ਕੰਸ ਪੁਛਾਰਿਓ ਤੇਸ ਛੂਨ ਸਿੰਧ ਜਰਾ ਕੀ ਮੈਂ ਸੁਨ ਸੈਨ ਸੁਧਾਰ ਬਿਦਾਰਿਓ ਐ ਹਮਰੇ ਪਰ ਅਗਰਜ ਸਿਆਮ ਕਹਿਓ ਕਨ ਸਿਆਮ ਤੇ ਕੌਣ ਵਿਚਾਰਿਓ ਮੋਹਿ ਡਰਾਵਤ ਹੈ ਕਹਿ ਜੂੰ ਮੋ ਕੰਸ ਕੋ ਵੀਰ ਬਕੀ ਬਕ ਮਾਰਿਓ ਸਿੰਧ ਜਰਾ ਹੋਗੀ ਸੈਨ ਮੋਹ ਭਾਕਤ ਹੋ ਛਿਰ ਮਾਇ ਸੰਘਾਰਿਓ ਮੋ ਕੋ ਕਹਿ ਬਲਵੀਰ ਰੇ ਮੇਰੇ ਪੌਰਖ ਅਗਰਜ ਕੌਣ ਵਿਚਾਰਿਓ ਸੂਰਨ ਕੀ ਏ ਰੀਤ ਨਹੀਂ ਹਰ ਛਤਰੀ ਹੈ ਤੂੰ ਕੇ ਭਇਓ ਪਠਿਆਰਿਓ ਸੋਈਆ ਆਪਣੇ ਗ਼ੋਖ ਕੀ ਪਾਖ ਮੈਂ ਬਲ ਤੇਰੋ ਸਵੈ ਸੰਭੂਸ ਜਰੈ ਹੋ ਸਰੌਣ ਜਿਤੋ ਤੋ ਅੰਗਨ ਮੈ ਸੋ ਸਵੈ ਸਮ ਨੀਰਾ ਕੀ ਅਵਟੈ ਹੋ ਦੇਖ ਚਾ ਆਪਣੇ ਪੌਰਖ ਕੋ ਰਣ ਮੈਂ ਜਬ ਹੀ ਕਬ ਚੜੈ ਹੋ ਤੋ ਤੇਰੋ ਅੰਗ ਕੋ ਸਵੈ ਤੇ ਭੀਤਰ ਢਾਰ ਕੈ ਆਛੈ ਪਕੈ ਹੋ ਸੋਈਆ ਐਸੇ ਵਿਵਾਦ ਕੈ ਆਹਮ ਦੋ ਕ੍ਰੋਧ ਭਰੇ ਅਜੁੱਧ ਮਚਾਇਓ ਬਨ ਸਿਉਂ ਦਿਵੋਰ ਦਿਵਾਕ ਤੂਰ ਉਠੀ ਰਤ ਪਈਨ ਛਾਇਓ ਕੌਤਕ ਦੇਖਣ ਕਉ ਸਸ ਸੂਰਜ ਆਏ ਹੁਤੇ ਤਿਨ ਮੰਗਲ ਗਾਇਓ ਅੰਤਨਾ ਸ਼ਾਮ ਤੇ ਜੀ ਸਕਿਓ ਸੋ ਵੰਤਹਿ ਕੋ ਪੁਨ ਤਾਮ ਸਿਦਾਇਓ ਸ੍ਰੀ ਪ੍ਰਜਨਾਥ ਨਿਓ ਕੋ ਕਉ ਸ਼ਾਮ ਕਹਿ ਕਰ ਗਾੜਿ ਅਯੋਧਨੁ ਹੋਵੈ ਕੈ ਕੂਪ ਧਰ ਜੁਦ ਕੀ ਸਮੈ ਬੈ ਕੋ ਤਨ ਸਰੌਣਤ ਸੰਗ ਪਰਿਓ ਪਰਿਓ ਦੇਖ ਦਇਆ ਉਪਜੀ ਕਰਨਾ ਨਿਦਕੇ ਮਨ छोर सरासन तीर कहो दिन आज के, के तह कर हो न कबे रण इत श्री दशम स्कंधे पुराणे विचित्र नाटक कृष्ण अवतारि बय दूर्त बधा बलपद्दर जू तीर्थ गवन कथ नंग चौपई तीर्थ करण बलपद्दर सदायो नीम खवारन पीतर आयो आए तहां नहाउने कहयो चित्त को कर दयौ तोमृ ਰੋਮ ਹਰਖਣ ਥੋ ਤਹਾ ਸੋ ਆਇਓ ਤਹਾ ਦੌਰ ਹਲੀ ਮਦਰਾ ਪੀਤ ਥੋ ਕਬ ਸਿਆਮਤਾ ਹੀ ਠੌਰ ਸੋ ਆਏ ਠਾੜ ਪਇਓ ਤਹਾ ਜੜਿ ਆਹੇ ਸਿਰਨਾ ਨਿਵਾਇ ਕੈ ਬਲਪੱਦਰ ਕੁਪਿਓ ਕਮਾਨ ਕਰ ਲੈ ਮਾਰਿਓ ਤਹਿ ਧਾਇ ਕੈ ਜੋ ਵੀ ਸਭ ਰਖ ਉਠ ਠਾਡੇ ਤਪੈ ਆਨੰਦ ਬਿਸਰ ਚਿਤ ਕੇ ਗਏ ਇਕ ਰਖ ਥੋ ਤਿਨ ਐ ਸੁਚਾਰਿਓ ਬੁਰਾ ਕੀਓ ਹਲਦਰ ਦਿਜ ਮਾਰਿਓ ਤਬ ਹਲਦਰ ਪੁਨੇ ਆਇਆ ਸੁ ਧਰਿਓ ਬੈਠ ਰਿਓ ਕਿਉ ਨ ਹੰਤੇ ਡਰਿਓ ਤਬ ਮੈਂ ਕਰੋ ਚਿਤ ਮੈਂ ਕੀਓ ਮਾਰ ਕਮਾਨ ਸੰਗ ਇਹ ਦੀਓ ਸੋਈਆ ਛਤਰੀ ਕੋ ਭੂਤੋ ਕੋ ਪਰੇ ਤਿਹਨਾਸ ਕੀਓ ਬਿੰਤੀ ਸੁਨ ਲੀ ਜਾਏ ਠਾੜ ਭੈ ਉਠ ਕੇ ਰਿਕਸੋ ਜੜ ਬੈਠ ਰਿਓ ਕਹਿਓ ਸਾਜ ਪਤੀ ਜੈ ਬਾਤ ਵਹ ਕਰਿਐ ਸੰਗ ਛਤਰਨ ਜਾ ਕੇ ਕੀਏ ਜਗ ਭੀਤਰ ਜੀਜੈ ਤਾਹੀ ਤੇ ਮੈਂ ਬਦਤਾ ਕੋ ਕੀਉ ਸੋਬੈ ਮੋਰੀ ਭੂਲ ਛਿਮਾਪਨ ਕੀਜੈ ਰਿਖਵਾਜ ਹਰੀ ਸੋ ਚਉਪਈ ਮੇਲ ਸਭ ਰਿਖਨ ਹਾਲੀ ਸੋ ਪਾਖੀ ਕਹਿ ਸਿਆਮ ਤੇ ਦਿੱਕੀ ਸਾਖੀ ਇਹ ਬਾਲ ਕਥਾਪ ਰੋਸ ਕੋ ਖਰੋ ਬਹੁ ਰੋ ਜਾਇ ਤੀਰਥ ਸਭ ਕਰੋ ਕਬਿਉ ਬਾਛ ਸਵਯਿਆ ਚਾਰੋਈ ਭੇਦ ਮੁਖਾ ਗਰਜਿ ਹੋਇਐ ਤਾ ਸਤ ਕੋ ਬਰਿਆ ਸੋ ਦਿਉ ਸੋ ਐਸੇ ਪ੍ਰਹਾਨ ਲਗਿਓ ਰਟਨੇ ਮਨੁ ਤਾਤ ਸੋ ਤੇ ਫੇਰ ਜਿਉ ਜੇ ਧਿਆਨ ਤਕੈ ਸਭ ਹੂ ਰਖ ਕੇ ਮਨ ਕਉ ਜੇ ਕੀ ਸਮ ਕਉਨ ਸਿਰ ਨਿਆਇ ਤਿਨੈ ਸੁਖ ਕੈ ਤੀਰਥਨ ਸਿਆਮ ਸੋ ਰਾਮਾ ਪੈਣ ਲਿਓ ਸਵਈਆ ਗੰਗਾ ਸਿੰਧ ਜਹਾ ਮਿਲਥੋ ਪ੍ਰਿਥਮੈ ਬਲ ਭੱਦਰ ਤਹਾ ਚਲ ਨਾਯੋ ਫੇਰ ਤ੍ਰਿਬੈਨੀ ਮੈਂ ਕੈ ਇਸਨਾਨ ਦੇਹ ਦਾਨ ਬਣੀ ਹਰ ਦੁਆਰ ਸਿਧਾਯੋ ਨਾਏ ਤਹਾ ਪੁਨ ਬਦਰੀ ਕੇਦਾਰ ਹੀ ਮਨ ਮੈਂ ਸੁਖ ਪਾਇਓ ਔਰ ਗਨੋ ਕਹ ਜਗ ਕੇ ਸਭ ਤੀਰਥ ਕਹਿ ਤੇ ਠੌਰ ਆਯੋ चौपी फिर नेम खान में आयो वैरिखण को बात निवायो तीर्थ कहयो मैं सब ही करे विद पूर्व ज्यों तुम उचरे हरि बात चौपी अब आइस जो होए सो करो हे रिख तुमरे पायन परो अब आइस जो होए सो कीजए हे रिख बाताए सत पतिजए रिखबाज चौपी तब मिल रिखण एजी धारो एक सत्र है बड़ो हमारो बलनु नाम हाल धरते मारो मानू ते पै काल प्रचारो ਹਰੀ ਬਾਜ ਦੋਰਾ ਕਹਾ ਠੌਰ ਤੇ 70 ਕੀ ਕਹ ਰਿਖਨ ਕੇ ਰਾਜ ਮੋਹਿ ਬਤਾਵੈ ਜਾਹੇ ਕਹ ਤਾਹੇ ਹਨੂ ਹੋ ਆਜ ਚੌਪਈ ਤਬ ਇਕ ਰਖਨੇ ਜਾਏ ਬਤਾਇਓ ਜਾਂ ਠੌਰ ਹੋ 70 ਬਨਾਇਓ ਜਾਂ ਸੋ 70 ਨਿਹਾਰਿਓ ਹਮ ਸੰਗ ਲਰ ਇਹ ਪਾਤ ਵਿਚਾਰਿਓ ਚੌਪਈ ਸੰਤ ਵਜਨ ਤਵ 70 ਰਸਾਇਓ ਹਾਦ ਗਾਂਗਨੋ ਜਾ ਪਰਿ ਆਇਓ ਹਲਦਰ ਸੰਗ ਜੋਦਿਆ ਕਹਿਓ ਜੇ ਸੰਹੋਰ ਵੀਰ ਨਹੀਂ ਹੈਓ बहुत युद्ध ते ठा दू तारो दू सूरते एक ना हारो जो थक जाय बैठत रहै मुछत होए जोद्ध फिर चाह चौपाई फिर दू गाज गाज रन पारै आपस बीच गदा बहु मारै ठाढ़ रहै फिर पैग ना टरै मानों रिस परबत धूल रै दो पाट अभरण ज्यों गाजै सुंद दिन के जमलाजै अति भीड़ सै में भरे दो वीर क्रोध सो ਜੀਨ ਕੌਤਕ ਦੇਖਣ ਸੁਰਿਆਏ ਪਾਂਤਨ ਭਾਂਤ ਵਿਵਾਨ ਬਣਾਏ ਉਤਰੰਭਾ ਦੇਕ ਨਿਰਤਾ ਕਰਾਏ ਇਤ ਤੇ ਵੀਰ ਭੂਮੈ ਲਰੈ ਬਹੁਤ ਗਦਾ ਤਨ ਲਗੈ ਨਾ ਜਾਣੈ ਮੁਖਤੇ ਮਾਰ ਹੀ ਮਾਰ ਬਖਾਨੈ ਹਰਣ ਕੀ ਛੇਤੇ ਪੈਗ ਨਾ ਟਰੈ ਰੀਧ ਰੀਧਉ ਭਟ ਲਰੈ ਸੋਈਆ ਜੋਤ ਪਇਓ ਬਹੁਤੋ ਤੇਠਾ ਤਬ ਮੂਸਲ ਗਉ ਮੁਸਲੀ ਜੂ ਸੰਭਾਰਿਓ ਕੈ ਦੋ ਮਨ ਕੈ ਕਬ ਸ਼ਾਮ ਕੈ ਤਗਤਾਹੇ ਪ੍ਰਹਾਰਿਓ लांग द काय होवै मर गयो आरी अंतह के हुन धाम सिधारयो जो बलपद रहन्यो तिनको सब विपन्न को पुनकाज सवारयो सुैया पौर्ख जो मुसली धारको कहो रिपको सुखदेव सुनायो जाय कथा दिजके मुखते सब श्रवण सुनी तिनहु सुख पायो जाके किए सससुर निसा देव ताई की बात सुनो जी आयो ताहि की बात सुनाओ द जो तुम वेदन कह जो भेद न पायो सोइया जाहे खरानन से सा सानन खोज रह कज पार न पायो सया पने जे को चतुराणन वेदन के गुण पीतर गायो खोज रह शिव से जे अंत अनंत कहो थक अंत न पायो ताही की बात सुनो तोरे मुख ते सुख है ठार ਉਪਦੇਜੋ ਇਹ ਭਾਂਤ ਕਹੋ ਸੁਖ ਕਹੋ ਸੁਖ ਹੂੰ ਇਹ ਭਾਂਤ ਸੁਨਾਈ ਦੀਨ ਦਿਹਾਰ ਕੀ ਬਾਤ ਸੁਨਾਬਤ ਹੋ ਤੋਹ ਕਹੋ ਤੋਹ ਭੇਦ ਛਪਾਈ ਬਿਪਰ ਸੁਦਾਮਾ ਹਤੋ ਬਿਪਤਾ ਤਹਿ ਕੀ ਹਉ ਕਹੋ ਹਰਿ ਜੈਸੇ ਮਿਟਾਈ ਸੋਹ ਸੁਨਾਬਤ ਹੋ ਤੋਹ ਕਹੋ ਸੁਨ ਲੈ ਸੋ ਸ੍ਰੋਨਨ ਦੈ ਨਿਰਪrai ਇਤ ਸ੍ਰੀ ਦਸ਼ਮ ਸਕੰਧੇ ਪੁਰਾਣੇ ਬਚਿਤਰਨਾਟ ਗ੍ਰੰਥੇ ਕ੍ਰਿਸ਼ਨ ਆਵਤਾਰੇ ਪਰ ਭੱਦਰ ਤੀਰਥੀ ਸ্নান ਕਰਦਾਤ ਕੋ ਮਾਰਤ ਗ੍ਰਹਿ ਕੋ ਆਵਦ ਭੈ ਧਿਆਏ